ਜੇ ਲੋਕ ਪਤਿਤ ਪੁਨੀਤ ਗੋਬਿੰਦ ਹੈ ਸਰਬ ਦੋਖ ਨਿਵਾਰਣ ਹੈ ਸ਼ਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਜਿਹੜਾ ਗੋਬਿੰਦ ਹੈ ਉਹ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਅਪਵਿੱਤਰਾਂ ਪਵਿੱਤਰ ਕਰਨ ਵਾਲਾ ਪਵਿੱਤਰੇ ਨਹੀਂ ਪੁਨੀਤ ਕਰ ਦਿੰਦਾ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ 40 ਡਿਗਰੀ ਤੱਕ ਲੈ ਜਾਂਦਾ ਨਰਾਕਾਰ ਹੀ ਬਣਾ ਦਿੰਦਾ ਨਰਾਕਾਰ ਰੂਪ ਗੰਕਾਰ ਬਣਾ ਦਿੰਦਾ ਆਪਣੇ ਚ ਮਲਾ ਲੈਂਦਾ ਅਨਿਤ ਗੋਬਿੰਦ ਸਰਬ ਦੋਖ ਨਿਵਾੜਨਾ ਸਾਰੇ ਦੁੱਖ ਜਿੰਨੇ ਇਹਦੇ ਔਗਣ ਨੇ ਸਾਰੇ ਕੱਟ ਕੇ ਪੁਰੀਤ ਕਰ ਲੈਂਦਾ ਤੇ ਦੋਖ ਨਿਵਾੜ ਦੀ ਸ਼ਕਤੀ ਉਹਦੇ ਚ ਹੈਗੀ ਹੈ ਸਭ ਸੂਰ ਭਗਵਾਨ ਜਿਹੜੇ ਐਸੇ ਭਗਵਾਨ ਦੀ ਛਣ ਪੈ ਜਾਂਦੇ ਨੇ ਐਸੇ ਕੋਈ ਦੂਜੀ ਛਣ ਪੈ ਨਹੀਂ ਜਾਂਦੇ ਜਿਹੜੇ ਗੁਰਗਾ ਬਾਣਾ ਮੰਨਦੇ ਨੇ ਸੂਰ ਮੰਨਦੇ ਨੇ ਸੂਰ ਮਿੱਟਿਓ ਨੇ ਮਰਨ ਕਬੂਲ ਕਰਨਾ ਸੂਰਮੇ ਦਾ ਕੰਮ ਮਰਨ ਕਬੂਲ ਕਰਕੇ ਹੀ ਆਪਣੀ ਮਰਜ਼ੀ ਛੱਡ ਕੇ ਹੀ ਸਰਨ ਪਿਆ ਜਾ ਜਿਹੜੇ ਜਪ ਲੈਂਦੇ ਨੇ ਜਪ ਕੇ ਉਹ ਛੱਡਦੇ ਨੇ ਸੂਰਮੇ ਹੀ ਹੁੰਦੇ ਨੇ ਜਿਹੜੇ ਜਪ ਲੈਂਦੇ ਨੇ ਫਿਰ ਹਰ ਦੇ ਨਾਲ ਛੁੱਟ ਕੇ ਆਪਰੇ ਹੋ ਵਰਗੇ ਹੋ ਜਾਂਦੇ ਨੇ ਹਰ ਹਰ ਹਰੇ ਹਰੇ ਹੋ ਜਾਂਦੇ ਹੈ ਮਤਲਬ ਤੇ ਕੋਈ ਤਾਂ ਕੇ ਕੋ ਹੋ ਜਾਂਦਾ ਹੈ ਹਰ ਹਰ ਹਰੇ ਹਾਂਜੀ ਛੱਡਿਓ ਹੱਬ ਤਾਪ ਨਾਨਕ ਪ੍ਰਭ ਤਖੰਦੇ ਆਂ ਗੱਲ ਫੇਰ ਕਹੀ ਹੈ ਮੁੜ ਕੇ ਉਹੀ ਗੱਲ ਰਿਪੀਟ ਕੀਤੀ ਹੋਈ ਹੈ ਦੋਹਾਂ ਸ਼ਲੋਕਾਂ ਚ ਇਵੇਂ ਹੀ ਚੱਲਦਾ ਪਿੱਛੇ ਤੇ ਹਾਂਜੀ ਛੱਡਿਓ ਆਪ ਆਪ ਜਿਹਨੇ ਸਾਰਾ ਆਪਾ ਤਿਆਗਤਾ ਆਪਣੀ ਮਰਜ਼ੀ ਤੇ ਆਗਤੀ ਲੱਕੜੋ ਚੜਨ ਪਾਸ ਉਹੀ ਚੜਣਾ ਨਾਲ ਲੱਗਿਆ ਉਹੀ ਗੁਰਕੇ ਚੜਨਾ ਦੇ ਨਾਲ ਜੁੜਿਆ ਜਿਹਨੇ ਆਪਣੀ ਜਾ ਸਕਦਾ ਗੁਰਬਾਣੀ ਨਾਲ ਨਹੀਂ ਜੁੜਿਆ ਸਕਦਾ ਜਾ ਸਕਦਾ ਡੱਟਣੋ ਤੋਂ ਉਹਦੇ ਫਿਰ ਦੁੱਖ ਔਰ ਸੰਤਾਪ ਸਾਰੇ ਦੂਰ ਵੀ ਹੋ ਜਾਂਦੇ ਨੇ ਕਿਤਾਬ ਵੱਲ ਤੱਕਦੇ ਹਾਂ ਜਦ ਆਪਣੇ ਮੂਰ ਨੂੰ ਦਰਸ਼ਨ ਹੋ ਜਾਂਦਾ ਆਪਣੇ ਮੂਰ ਤੇ ਦਰਸ਼ਨ ਹੋ ਕੇ ਆਪਣੇ ਅਪੇ ਦਾ ਜਿਆ ਸਮਝ ਆਉਂਦੀ ਹੈ ਸਮਝ ਆਉਂਦੀ ਹੈ ਪਏ ਦੁਆਰਿਆ ਰਖ ਲੇਵੋ ਦੀਨ ਦਇਾਲ ਪ੍ਰਮਤ ਬਹੁ ਹਾਰਿਆ ਮੇਰੇ ਲਇਓ ਦਇਾਲ ਹੈ ਮੈਨੂੰ ਨਾਲ ਮਹਿਲਾ ਆ ਲਇਓ ਆਪਣੇ ਆਪਣੇ ਨਾਲ ਮਲਾ ਲਿਓ ਆਪਣੇ ਦੇ ਕੇ ਲੀਨ ਕਰ ਤੇਰੇ ਦੁਆਰੇ ਤੇ ਮੈਂ ਐ ਮੈਂ ਹੱਤਕੜੇ ਕਰ ਤੇ ਤੇਰੇ ਦੁਆਰੇ ਤੇ ਐ ਤੇ ਫਾਰਮਨ ਲਈ ਦੇ ਇੱਕ ਤੋਂ ਰੱਖ ਲੈ ਹੋ ਦੀਂ ਦਾ ਹਾਰ ਤ੍ਰਮਕ ਬਹੁ ਹਾਰਿਆ ਮੈਂ ਬਹੁਤ ਧਰਮ ਕੇ ਜਨਮਾਂ ਜਨਮਾਂ ਤੱਕ ਧਰਮ ਕੇ ਜਨਮ ਲੈ ਲੈ ਕੇ ਮੈਂ ਬਹੁਤ ਦੁਖੀ ਹੋ ਕੇ ਤੇਰੇ ਦੁਆਰੇ ਆਇਆ ਹੁ ਮੈਨੂੰ ਰੱਖ ਲੈ ਤੂੰ ਅਗਲਾ ਜਨਮ ਨਾ ਮੇਰਾ ਹੋਵੇ। ਰਮਤਬਾ ਹਾਰਿਆ ਮੈਂ ਜਨਮ ਲੈ ਲੈ ਕੇ ਹਾਰ ਗਿਆ। ਬਸ ਹੋ ਗਈ ਮੇਰੀ। ਹੁ ਮੈਂ ਹੋਰ ਜਨਮ ਨਹੀਂ ਬਿਨੋ ਮੋਹ ਸਾਰਿਆ। ਭਗਤ ਬਸ਼ਲ ਤੇਰਾ ਮਿਰਦ। ਤੇਰਾ ਕਿ ਉਹ ਆਰੇ ਹੈ ਕਿ ਤੂੰ ਭਗਤ ਜਿਹੜੇ ਤੇਰੀ ਭੰਕੀ ਕਰਦੇ ਨੇ ਜਿਹੜੇ ਤੇਰੇ ਅੱਗੇ ਆ ਕੇ ਟਹਿ ਡੇਰੀ ਹੋ ਜਾਂਦੇ ਨੇ ਤੇਰਾ ਆਸਰਾ ਤੱਕਦੇ ਨੇ ਸਮਝਦਾ ਧਰਮ ਹੈ ਉਹਨਾਂ ਨੂੰ ਤੂੰ ਪਤਤ ਉਧਾਰਿਆ ਉਹ ਜਿਹੜੇ ਪਤਤ ਨੇ ਵਿਚਾਰੇ ਗਰੀਬ ਨੇ ਉਹਨਾਂ ਦਾ ਉਧਾਰ ਕਰਨਾ ਤੇਰਾ ਧਰਮ ਹੈ ਤੂੰ ਕਦੇ ਉਸ ਆਪਣੇ ਫਰਜ਼ ਤੋਂ ਧਰਮ ਤੋਂ ਪਿੱਛੇ ਨਹੀਂ ਟਕਿਆ ਤੂੰ ਤੇ ਮੇਰਾ ਨਾ ਹੀ ਕੋਈ ਬਿਨੋ ਹੋਏ ਸਾਰਿਆ ਇਰੇ ਬਿਨਾ ਹੋਰ ਕੋਈ ਨਹੀਂ ਹੈ ਜਿਹੜਾ ਇਹ ਉਧਾਰ ਕਰ ਸਕਦਾ ਹੋਵੇ ਜੰਮਣ ਬਣ ਕੱਟ ਸਕਦਾ ਹੋਵੇ ਬਿਨੋਂ ਹੋਏ ਸਾਰਿਆ ਇਹ ਮੇਰੀ ਬੇਨਤੀ ਮੈਂ ਤੋਂ ਤੋਂ ਕਹਦਾ ਨਾ ਬੇਨਤੀ ਹੈ ਮੇਰੀ ਸਾਰ ਬੇਨਤੀ ਹੈ ਜਿਉੜ ਹੈ ਇਹ ਸਾਰੀ ਗੱਲ ਦਾ ਕਿ ਬਿਲਕੁਲ ਕੋਈ ਸਤੇ ਮੈਂ ਆਪਣੇ ਫੱਕੀ ਗੱਲ ਸੱਚਾਈ ਨਾਲ ਕਹਿਣਾ ਇਹ ਗੱਲ ਬਿਲਕੁਲ ਸੱਚ ਹੈ ਸਾਰੂਪ ਗੱਲ ਹੈ ਮੇਰੀ ਬੇਨੋ ਸਾਰੂਪ ਹੈ ਫੜ ਕੇ ਇਸ ਸੰਸਾਰ ਸਾਗਰ ਦੇ ਵਿੱਚੋਂ ਬਾਹਰ ਕੱਢ ਲੈ ਮੇਰੀ ਬਾਹ ਫੜ ਕੇ ਮੈਨੂੰ ਸੰਸਾਰ ਸਾਗਰ ਤੋਂ ਅਗਨ ਸਾਗਰ ਤੋਂ ਬਾਹਰ ਕੱਢ ਲੈ ਕਰ ਗੈ ਸਾਗਰ ਸੰਸਾਰਿਆ ਮੇਰੀ ਬਾਹ ਫੜ ਹਾਂ ਜੀ ਇਹ ਜੀ ਐ ਤੇ 16ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ